ਗੌੜੀ ਕੀ ਵਾਰ ਮਹੱਲਾ ਪੰਜਵਾਂ ਰਾਏ ਕਮਾਲਦੀ ਮੋਜਦੀ ਕੀ ਵਾਰ ਕੀ ਧੁਨੀ ਉੱਪਰ ਗਾਵਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਹਰ ਹਰ ਨਾਮ ਜੋ ਜਨ ਜਪੈ ਤੋ ਆਇਆ ਜਨ ਕੇ ਬਲਹਾਰਣੈ ਜਿਨ ਭਜਿਆ ਪ੍ਰਭ ਨਿਰਬਾਨ ਹਰਿ ਰਹਾ ਹਰ ਹਰ ਨਰਾਕਾਰ ਹਰ ਹਰ ਨਾਮ ਜੋ ਹਰ ਦਾ ਗਿਆਨ ਜਪੇ ਤੂਏ ਨਾਮ ਦਾ ਅਰਥ ਗਿਆਨ ਹੈ ਅੱਛਾ ਜੀ ਹਰ ਦੇ ਗਿਆਨ ਨੂੰ ਜਿਹੜਾ ਜਨ ਸਮਝਦਾ ਹੈ ਜਾਣਦਾ ਹੈ ਕੋਖਦਾ ਹੈ ਵਿਚਾਰਦਾ ਹੈ ਸੋ ਆਇਆ ਪਰਵਾਂ ਉਹ ਦੁਨੀਆਂ ਚ ਆਇਆ ਪਰਵਾਂ ਹਰ ਵਾਰ ਇਹ ਬਲਿਖਾ ਪਾਇਆ ਹੈ ਔਰ ਉਹ ਮੂਰਤੀ ਬਣਾ ਕੇ ਰੱਖਦਾ ਮੂਰਤੀ ਨਾ ਵੀ ਆਦਮੀ ਬਣਾ ਕੇ ਆਦਮੀ ਦੀ ਮੂਰਤੀ ਹੁੰਦੀ ਹੈ ਨਹੀਂ ਲੈਂਦਾ ਹਰ ਉਹ ਹੱਦ ਹੈ ਜਿਹੜਾ ਸਾਹ ਲੈਦਾ ਜਿਹੜਾ ਅੱਖਾਂ ਹੀ ਦੇਖਦਾ ਉਹ ਹੱਦ ਹੈ ਉਹ ਹਰ ਆ ਉਹ ਜਨ ਇਹ ਫਰਕ ਰੱਖ ਕੇ ਗੁਰਬਾਣੀ ਚੱਲੀ ਹੈ ਇੱਕ ਹਰ ਹੈ ਇੱਕ ਹਰ ਜਾਨ ਜੇ ਵਾਹਲਾ ਸੰਤ ਕਹੁੰਦਾ ਕਹੁੰਦਾ ਵੀ ਇਹ ਜੇ ਹੋ ਵੀ ਨਹੀਂ ਜਾਂਦਾ ਮੰਨ ਲੋ ਸੰਤ ਵੀ ਆਦੀ ਹੈ ਵਾਹਲੇ ਨੂੰ ਚਾਲੂ ਜੇ ਜਨ ਸ਼ਾਂਤ ਹੋ ਵੀ ਜਾਂਦਾ ਇਹਦਾ ਤਾਂ ਇਹ ਹਰਕਤ ਕਹਾ ਹਰਕਾ ਹਰ ਤੋਂ ਪੈਦਾ ਹੋਇਆ ਹੈ ਉਤਪਤੀ ਇਹਦੀ ਹਰ ਤੋਂ ਇਹਦਾ ਬੂੜ ਆ ਰਿਹਾ ਹਰਕਾ ਸੰਤ ਹੈ ਇਹ ਫਰਕ ਜਿਹੜਾ ਹੈਗਾ ਇਹ ਗੁਰਬਾਣੀ ਨੇ ਹਮੇਸ਼ਾ ਰੱਖਿਆ ਹੋਇਆ ਤੋਂ ਕਿਤੇ ਵੀ ਇਹ ਵਿਸਥੀ ਕੀਤਾ ਹੋਇਆ ਦੂਜਿਆਂ ਨੇ ਇਹਨੂੰ ਵਿਸਥੀ ਕੀਤਾ ਹੋਇਆ ਸਿੱਧੂ ਮੋਟਾਲਿਆ ਨੇ ਜਿਨ੍ਹਾਂ ਨੇ ਆਦਮੀ ਨੂੰ ਪਰਮੈਸ਼ਰ ਦੇ ਜਗ੍ਹਾ ਬਣਾਉਣਾ ਸੀ ਉਹਨਾਂ ਨੇ ਵਿਸਥ ਕਰਤਾ ਸੀ ਹਰ ਹਾਲ ਨਾਮ ਜੋ ਜਲ ਜਪ ਸੋ ਆਇਆ ਪ੍ਰਵਾਨ ਹਰ ਹਰ ਕਰਦੇ ਰਹਿਣਾ ਬਾਲਾ ਵੱਡ ਕੇ ਉਹਨਾਂ ਦਾ ਆਇਆ ਪ੍ਰਵਾਨ ਨਹੀਂ ਦੂਜੀ ਗੱਲ ਇਹ ਵੀ ਹੈ ਠੀਕ ਹੈ ਪਹਿਲਾ ਹਰ ਜਿਹੜਾ ਹੈ ਉਹ ਅਲੱਗ ਹੈ ਤੇ ਹਰ ਨਾਮ ਇੱਕ ਹੈ ਹਾਂਜੀ ਕਹਿਣ ਦਾ ਭਾਵ ਚੇਤਨ ਦੀ ਗੱਲ ਹੋ ਰਹੀ ਹੈ ਤੇ ਅਸੀਂ ਇਹਨੂੰ ਜਰਨਲ ਜੋੜ ਲਿਆ ਹਾਂਜੀ ਹਰ ਤਾਂ ਚੇਤਨ ਉਹ ਵੀ ਵੈਸੇ ਮੂਰਤੀ ਬਣਾਈ ਬੈਠੇ ਨੇ ਪਰ ਉਹ ਜੇ ਤਾਂ ਜਿਹੜਾ ਮੂਰਤੀ ਵਿੱਚ ਸੀ ਹਰ ਹਰ ਜਨ ਦੋਏ ਇੱਕ ਹੈ ਹਰ ਔਰ ਹਰ ਜਨ ਦੋਏ ਮਿਲ ਇੱਕ ਨੇ ਕਿਵ ਬਿਚਾਰ ਕਛੁ ਨਾ ਹੈ ਇਹਦੇ ਵਿੱਚ ਕੋਈ ਵੀ ਪਿੰਦ ਭੇਦ ਵਾਲੀ ਗੱਲ ਨਹੀਂ ਹੈ ਵਿਚਾਰ ਵਾਲੀ ਕੋਈ ਗੱਲ ਨਹੀਂ ਨਹੀਂ ਵਿਚਾਲਤ ਤੇ ਉਪਜ ਤਰੰਗ ਜਿਉਂ ਜਲੀ ਵੀ ਕਿਸਮਾਨ ਜਿਵੇਂ ਜਲ ਚੋਂ ਤਰੰਗ ਪੈਦਾ ਹੁੰਦੀ ਹੈ ਜਲ ਚ ਸਮਾ ਜਾਂਦੀ ਹੈ ਐਂ ਹਰ ਚੋਂ ਪੈਦਾ ਹੁੰਦਾ ਹਰ ਚੇ ਸਮਾ ਜਾਂਦਾ ਹੈ ਹਰ ਹੱਸ ਕਹਿੰਦਾ ਭਾਵੇਂ ਵੀ ਹਰ ਤੇ ਹਰ ਜਨ ਮਿਲ ਕੇ ਇੱਕ ਹੋਏ ਹੈ ਪਹਿਲਾਂ ਤਾਂ ਅੱਧ-ਅੱਧ ਹੀ ਸੀ ਹਾਂਜੀ ਹਾਂ ਪਹਿਲਾਂ ਅੱਧ-ਅੱਧ ਇਹ ਅਸੀਂ ਸੋਚੀ ਜਾਂਦੇ ਆਂ ਕਿ ਹਰ ਵੀ ਪੂਰਾ ਤੇ ਹਰ ਜਨ ਵੀ ਪੂਰਾ ਉਹ ਤਾਂ ਫਿਰ ਇੱਕ ਔਰ ਦੋ ਹੋ ਜਾਣਗੇ ਦੋ ਹੋ ਜਾਣਗੇ ਤਾਂ ਹੀ ਤਾਂ ਡਾਂਗੋ ਡਾਂਗੀ ਹੋਏ ਫਿਰ ਬੈਨ ਲੜਦੇ ਠੀਕ ਹੈ ਲੜਾਈ ਦਾ ਜਦੂ ਆ ਜਾਂਦਾ ਕਾਹ ਤਿਸ ਜਨ ਕੇ ਬਲਹਾਰਣ ਜਿਨ ਭਜਿਆ ਪ੍ਰਭ ਨਿਰਬਾਨ ਉਸ ਜਨ ਦੇ ਬਲਿਆਰੇ ਜਾਈਏ ਉਹਦੇ ਬੁੱਧਵਾਲ ਅੱਗੇ ਝੁਕ ਜਾਈਏ ਬਿਹਾਰੇ ਹੁੰਦਾ ਉਹਦੇ ਬੁੱਧਵਾਲ ਅੱਗੇ ਝੁਕ ਜਾਣਾ ਆਪਣੀ ਬੁੱਧੀ ਉਹਦੇ ਬੁੱਧਵਾਲ ਕੋਲ ਹਾਰ ਮੰਨ ਲਵੇ ਬੜਾ ਮੰਨ ਲਵੇ ਇਹ ਜਿਹੜਾ ਹਰ ਨਿਰਵਾਣ ਹਰ ਨਿਰਵਾਣ ਹੱਦੀ ਬੋਲਦਾ ਬੋਲਦਾ ਜਾਣ ਨਿਰਵਾਣ ਹੈ ਬੋਲਦਾ ਨਹੀਂ ਹੈ ਐਣੀ ਬੋਲਦਾ ਜੇ ਕੰਨਾਂ ਨੂੰ ਸੁਣ ਪਵੇ ਬੋਲਦਾ ਜ਼ਰੂਰ ਹੈ ਜਾਣੀ ਉਹਦੀ बोली ਨੂੰ ਬਾਣੀ ਨਹੀਂ ਕਹਿ ਸਕਦੇ ਆ ਜਿਹੜੀ ਅਸੀਂ ਕੰਨਾਂ ਨਾਲ ਸੁਣਨ ਵਾਲੀ ਹੈ ਜਿਹਨੇ ਭਜਿਆ ਜਿਹੜਾ ਜੁੜ ਗਿਆ ਆਪਾਂ ਜਨਮਾਂ ਨਾਲ ਜੁੜਨਾ ਹੈ ਕਿਹੜਾ ਨਿਰਵਾਣ ਪ੍ਰਹਾਲ ਨਾਲ ਜੁੜ ਗਿਆ ਉਹ ਜਲਦੇ ਬਲਿਆ ਹੋਰ ਨੇ ਠੀਕ ਹੈ ਜਾਹ ਦੇ ਭੇਟਿਆ ਉਹਦੇ ਨਾਲ ਜਨਮ ਮਰਤ ਕਟਿਆ ਗਿਆ ਕਿਉਂਕਿ ਉਹਦਾ ਜਨਮਾਂ ਤੇ ਪਰੇ ਆ ਹਰਤਾ ਜਿਹੜਾ ਉਹਦੇ ਨਾਲ ਜੁੜ ਗਿਆ ਉਹਦਸ ਕਟਿਆ ਗਿਆ ਜਨਮਾਂ ਤੋਂ ਕਟਿਆ ਹਰ ਭੇਟਿਆ ਪੁਰਖ ਤੇ ਜਾਣ ਪੁਰਖ ਹੈ ਸੁ ਜਾਣ ਕਹਿੰਦੇ ਨੇ ਜਿਹਨੂੰ ਮਾਇਆ ਦੇ ਵਿੱਚੋਂ ਰਸਤਿਆਂ ਦਾ ਪਤਾ ਕਿਹੜੇ ਰਾਹ ਦਿੱਤਣ ਮਾਇਆ ਦਾ ਜਿਹੜਾ ਜਾਲ ਹੈ ਨਾ ਉਹਨੂੰ ਪਛਾਣ ਨਹੀਂ ਸਕਦਾ ਉਹ ਕੋਈ ਨਾ ਸਰੀਰ ਵਾਲਾ ਜਿਵੇਂ ਆਪਣਾ ਕੋਈ ਚਾਲਣੀ ਚੱਲਦੀ ਹੁੰਦੀ ਹੈ ਚਲਦੀ ਆ ਪਵਣਾਉਂਦੇ ਚਲਦੀ ਜੀ ਦੁੱਧ ਨਿਕਲ ਜਾਂਦਾ ਜੇ ਕੋਈ ਦੁੱਧ ਤੋਂ ਇਲਾਵਾ ਚੀਜ਼ ਹੁੰਦੀ ਹੈ ਤਾਂ ਕੜੌੜਾ ਰਹਿ ਜਾਂਦਾ ਉਹ ਰੂਪ ਹੈ ਉਹ ਜਿਹੜਾ ਜਿਹੜੀ ਜਾਲ ਹੈ ਚੱਲਦੀ ਹੈ ਪਾਰ ਹੋ ਜਾਂਦਾ ਇਹ ਰੋਗ ਨਹੀਂ ਸਕਦੀ ਹੈ ਜੰਬ ਜਾਲ ਜਾਣਕਾਰੀ ਹੈ ਵੀ ਇਹਦੀ ਮੋਰੀ ਐਡੀ ਚੌੜੀ ਹੈਗੀ ਆ ਮੈਂ ਉਸ ਤੋਂ ਪਤਲਾ ਹੋ ਕੇ ਨਗੜ ਜਾਾਂ ਉਹ ਬਣਦਾ ਮੋਟਾ ਹੁੰਦਾ ਉਹਨੇ ਆਪਣੇ ਆਪ ਨੂੰ ਇਨਾ ਬ੍ਰੀਕ ਕਰ ਲਿਆ ਜਿਵੇਂ ਜਾਲ ਜੀ ਪਾ ਜਾਂਦਾ ਜਾਂ ਮਰਜੀ ਉਧਰ ਜੇ ਮਰਜੀ ਉਧਰ ਠੀਕ ਹੈ ਜੀ ਇਹ ਆਪਾਂ ਹਰ ਭੇਟਿਆ ਪੜਾਂਗੇ ਹਰ ਭੇਟੀਆਂ ਪੜਾਂਗੇ ਜੇ ਹਰ ਨੂੰ ਭੇਟ ਦਿੱਤਾ ਜਾਵੇ ਮਨ ਨਹੀਂ ਹਰ ਭੇਟਿਆ ਹਰ ਭੇਟ ਲਿਆ ਹਰ ਹਰੇ ਪੁਰਖ ਹੈ ਤੇ ਸੁਜਾਨ ਪੁਰਖ ਹੈ ਠੀਕ ਜੀ ਫਿਰ ਜੇ ਭੇਟਿਆ ਆ ਜੂਗਾ ਫਿਰ ਕਟਿਆ ਨਹੀਂ ਜਾਣਾ ਅੱਛਾ ਭੇਟਣ ਦਾ ਮਤਲਬ ਹੈ ਆਪਣਾ ਆਪਾ ਵਾਰਤਾ ਜੀ ਨਾ ਭੇਟੇ ਦਾ ਮਤਲਬ ਬਾਲਾ ਨਹੀਂ ਦਾ ਭੇਟੇ ਦਾ ਮਤਲਬ ਲਿਪੜ ਜਾਣਾ ਇੱਕ ਦੂਏ ਦੇ ਵਿੱਚ ਮਿਲ ਜਾਣਾ ਅੱਛਾ ਜੀ ਆ ਜਾਣਾ ਮਿਲ ਜਾਣਾ ਠੀਕ ਹੈ ਇੱਕ ਵਿੱਚ ਹੋ ਜਾਣਾ ਹੈ ਇੱਕ ਵਿੱਚ ਪਹੁੰਚ ਜਾ ਇੱਕ ਵਿੱਚ ਸੰਤ ਸੰਗੀ ਸਾਗਰ ਤਰੇ ਜਨ ਨਾਨਕ ਸੱਚਾ ਦੇਖੋ ਸੰਗੀ ਹੋ ਜਿਹੜਾ ਸੰਤ ਸੰਗੀ ਹੈ ਸਾਗਰ ਤਰ ਜਾਂਦਾ ਕੋਈ ਵੀ ਹੋਵੇ ਇੱਥੇ ਕਿਸੇ ਵਾਸਤੇ ਵੀ ਹੈ ਸਾਥ ਸੰਗੀ ਸਾਗਰ ਤਰੇ ਜਾ ਨਾਨਕ ਸੱਚਾ ਤਾਂ ਜਨ ਨਾਨਕ ਕਹਿਣਾ ਉਹਦੇ ਕੋਲ ਸੱਚਾ ਸ਼ਕਤੀ ਹੁੰਦੀ ਹੈ ਸੱਚੀ ਸ਼ਕਤੀ ਸੰਤ ਵਾਲੀ ਸ਼ਕਤੀ ਸੰਤ ਕੋਲ ਸੱਚੀ ਸ਼ਕਤੀ ਹੁੰਦੀ ਹੈ ਕਾਦੀ ਹੁੰਦੀ ਹੈ ਸੱਚੀ ਸ਼ਕਤੀ ਨਾਮ ਦੀ ਹੁੰਦੀ ਹੈ ਅਨਕ ਸੰਤ ਮੈਲੇ ਸੱਚ ਪਾਈ ਹੈ ਸਤਿਗੋਸ਼ ਵਿੱਚ ਸਾਤਾ ਨੂੰ ਪਿਆ ਸੀ ਸਾਤਾ ਕੋਲ ਸੱਚ ਉੱਤੇ ਸੱਚ ਤੋਂ ਵੱਡੀ ਕੋਈ ਸ਼ਕਤੀ ਹੋਣੀ ਹੈ ਜੇ ਕੋਣ ਸੱਚਾ ਸੱਚ ਦੀ ਧੋਰਾ ਉਹ ਡੋਰ ਨਹੀਂ ਕਿਤੇ ਟੁੱਟਣਾ ਠੀਕ ਹੈ ਸੰਤ ਦਾ ਜਿਹੜਾ ਅਕਾਲੀ ਸੰਤ ਕੋਲ ਟੀ ਬੜੀ ਸ਼ਕਤੀ ਵਾਲੀ ਧੋਰਾ ਜਿੱਥੇ ਆਹ ਉਹ ਧੋਰਾ ਧਾਇ ਉਹਦੀ ਲੰਬਾਈ ਦਾ ਵੀ ਨਹੀਂ ਪਤਾ ਉਹਦੀ ਸ਼ਕਤੀ ਦਾ ਵੀ ਨਹੀਂ ਪਤਾ ਉਹ ਡੁੱਬੇ ਨਹੀਂ ਸਕਦਾ ਇਹ ਸੰਤ ਅੰਦਰ ਹੈ ਨਾ ਜੀ ਅਸੀਂ ਤਾਂ ਸੋਚਦੇ ਹਾਂ ਵੀ ਕੋਈ ਬਾਹਰ ਚਿੱਟੇ ਕੱਪੜਿਆਂ ਵਾਲਾ ਸੰਤ ਹੈ ਉਹ ਚਿੱਟੇ ਕੱਪੜੇ ਆਲਾ ਦਾ ਡੁੱਬ ਜਾਣਾ ਸਿੱਧ ਕੇ ਦੇਖ ਲੋ ਫਿਰ ਫਰਦੋਨੰਗ ਵੀ ਕੋ ਚਾਹਾਂ ਹੋਵੇ ਉਹ ਦਾ ਡੋਵੇ ਤੇ ਪਤਾ ਲੱਗੂ ਦਾ ਵੀ ਹੋ ਸਕਦਾ ਹੁਣ ਤੇ ਪਤਾ ਲੱਗੂ ਗੋਤਾ ਦਿੱਤੇ ਇੱਥੇ ਤਾਂ ਅੰਦਰਲੇ ਸੰਤਾਂ ਨਾਲ ਭਾਵ ਹੈ ਨਾ ਜੀ ਹਾਂ ਅੰਦਰ ਤੋਂ ਉਹਦੇ ਵੀ ਦੇ ਇਹਦਾ ਹੁਣ ਸਾਡੇ ਇਹ ਠੀਕ ਉਤਾਰਿਆਉ ਨਹੀਂ ਠੀਕ ਹੈ ਜੀ ਹਾਂਜੀ ਮਹੱਲਾ ਪੰਜਵਾਂ ਭਲਕੇ ਉੱਠ ਪਰੋਹਣਾ ਮੇਰੇ ਘਰ ਆਵੋ ਪੌਂ ਪਖਾਨਾ ਤਿਸਕੇ ਮਨ ਤਨ ਨਿਤ ਭਾਵੋ ਪਰੋਣਾ ਖਵਰੇ ਕੀਦਾ ਹੋ ਤੇਰੇ ਘਰ ਗਾਦੇ ਆਜਵੇਂ ਪਰੋਣਾ ਦਾ ਘਰ ਵੀਰੇ ਆਵੋ ਅਸਲ ਸੱਚ ਕੱਤ ਵੱਲੋਂ ਬੋਲੀ ਗਈ ਆ ਪਰ ਪੱਤੀ ਜਿੰਨੇ ਵੀ ਇਹ ਪਵਸਾ ਕਰਦੇ ਨੇ ਸਾਰੇ ਪਰੋਣੇ ਨੇ ਇਹ ਪਰੋਣ ਚੜੀ ਗਏ ਹੋਏ ਨੇ ਜੇ ਲਾ ਉਠੂਗਾ ਨਾ ਜਿਹਦੇ ਫਲਕੇ ਹੋਣਾ ਜਿਹਦੇ ਨਾਲ ਚੱਲਣ ਹੋ ਜਵੇ ਸੂਰਜ ਦੇ ਚੱਲਣ ਤੋਂ ਪਹਿਲਾਂ ਇਹ ਵਿਵਸਥਾ ਹੋ ਜਵੇ ਫਲਕੇ ਉੱਠ ਪਰੋਣਾ ਜਿਹੜਾ ਸਵੇਰ ਵੇਲੇ ਪਰੋਣਾ ਉੱਠਦਾ ਮੇਰੇ ਘਰ ਆਵੋ ਘਰ ਕੋਈ ਆ ਉੱਥੇ ਜਾਣਾ ਹੋਰ ਤਾਂ ਉਹਦੀ ਘਰ ਕੋਈ ਨਾਰੇ ਪਾਸੇ ਬੈਠੇ ਨੇ। ਕਿਨਾਰੇ ਤੇ ਹੁੰਦਾ ਜਿਹੜਾ ਹੁੰਦਾ। ਜਿੱਤੇ ਕਬੀਰ ਕਹਿੰਦਾ ਸਾਇ ਜਸੁਨ ਕਹੇ ਘਾਟ ਘਾਟ ਤੇ ਤਾਂ ਬੈਠਾ ਹੀ ਆ ਉਹ ਕਿਨਾਰੇ ਤੇ ਬੈਠਾ। ਵਕੀਰ ਤੇ ਬੈਠਾ ਜਾਂ ਜਾਗਦਾ। ਅੱਧਾ ਉੱਤਰ ਅੱਧਾ ਉੱਤਰ ਹੈ। ਕਹਨੇ ਉੱਠ ਪਰਵਾਨਾ ਜੇ ਉੱਠ ਵੀ ਖੜਿਆ ਕਹਿੰਦੇ ਮੇਰੇ ਘਰ ਆ ਬੋ ਬੁਲਾਉਣਾ ਦਾ ਪੈਣਾ ਵੀ ਭਾਈ ਆ ਜਾ ਅੰਦਰ। ਤੇਰੀ ਕੀ ਪਿਛੇ ਹੜਨੀਕ ਤੇ ਕਾਹਦੇ ਬੈਠਾ? ਇਹ ਜੀ ਕੋਈ ਕਹਨੋ। ਹਾਂਜੀ ਇਹ ਐ ਨਹੀਂ ਲੱਗਦਾ ਵੀ ਚਿੱਤ ਮਨ ਨੂੰ ਕਹਿ ਰਿਹਾ ਕਿ ਨਹੀਂ ਕੀ ਵੀ ਚਿੱਤ ਮਾਨੇ ਸੁਤਾ ਸੀ ਜਾਂ ਮਾਨੇ ਉੱਠਿਆ ਹੋਵੇਗਾ ਨਾ ਨਾ ਨਾ ਜਾਗਦੇ ਨੇ ਜਾਂ ਜਾਗਦੇ ਨੇ ਜਾਗਦੇ ਨੇ ਕੋ ਜਨ ਜਾਂ ਜਾਗਦੇ ਨੇ ਦੂਆ ਤਾਂ ਰਹਿੰਦਾ ਹੀ ਨਹੀਂ ਹੈ ਤੇ ਕੋ ਜਨ ਉਹਦਾ ਸੱਚ ਕਰਨ ਵਾਲੇ ਕਹਿੰਦੇ ਨੇ ਆਜੋ ਆਜੋ ਆਜੋ ਉਹਦਾ ਆਗੇ ਘਰ ਸੋਹਾਂ ਦੇ ਪੁੱਲੇ ਸ਼ਾਮ ਨੂੰ ਉਹ ਵੀ ਉਹੇ ਤਰ੍ਹਾਂ ਨੇ ਆਇਆ ਹੁੰਦਾ ਜਿਵੇਂ ਅਜੂੜਾ ਖਾ ਕੇ ਠੀਕ ਹੈ ਉਹ ਮਸਾਫ ਆਇਆ ਹੋਵੇ 100 ਸਾਲ ਦਾ ਆਦਮੀ ਉਹ ਹੋਈ ਹੋਵੇ ਪਤਾ ਨਹੀਂ ਕਿੰਨਾ ਖੋਲਣਾ ਪਤਾ ਨਹੀਂ ਕਿੰਨਾ ਬੇਰੇ ਘੜਾਵੋ ਪਾਉ ਪਖਾਲਣਾ ਤਿਸਕੇ ਮਨ ਤਨ ਨਿਤ ਪਾਉ ਪੈਰ ਤੋਂ ਪੈਰ ਤੋਂ ਇਹ ਜਿਹੜੀ ਮਿੱਟੀ ਆ ਨਾ ਲੈ ਆਇਆ ਉੱਥੋਂ ਪਿੱਛੋਂ ਉਹ ਵੀ ਝਾੜਦੇ ਹੋ ਉਹ ਮਿੱਟੀ ਮੁੱਟੀ ਨਾਲੇ ਉਹਦੀ ਪਹਾੜੀ ਹੈ ਸੇਵਾ ਵੀ ਤਾਂ ਹੈ ਹਾਂਜੀ ਉਹ ਪਖਾਲਣਾ ਕਰਕੇ ਮੈਨੂੰ ਦਿੱਸ ਕੇ ਲੱਗਦਾ ਹੈ ਜਿਹੜਾ ਘਰ ਆ ਗਿਆ ਨਾਮ ਸੁਣੇ नाम संग्रह नाम में जीव लावो ग्रह तन सब पवित्र होए हर के गुण गावो आ देखो नाम सुंदरला फेरे नाम ऐते आके कदे नाम को नी जाना अच्छा नाम सुनरो नाम सुनो उतर कदे नाम सुनना बात नी हो गया असली नाम तो उठै सुनणा जाके ਅੱਜ ਤਾਂ ਅਸਲੀ ਉਥੇ ਨਹੀਂ ਸੋਣਾ ਹੈ ਇੱਥੇ ਤਾਂ ਹੈਗਾ ਨਹੀਂ ਬਾਹਰ ਕਿਉਂ ਫਿਰਦੇ ਹੋ ਕੁੱਤੇ ਬੱਲੇ ਆ ਬਾੜ ਬਗਿਆੜ ਨੇ ਖਾ ਜਾਣਗੇ ਬਾੜੇ 'ਚ ਵੜਜੋ ਇੱਥੇ ਤਾਂ ਪੇਗਾ ਬਾੜੇ 'ਚ ਬਾੜੀਆਂ ਨੇ ਸਿਰਫ ਲਿਆ ਕੇ ਘਰੇ ਵਾੜੇ ਦੇ ਅਸਲੀ ਗਿਆਨ ਤਾਂ ਸੱਚਖੰਡ ਤੋਂ ਮਿਲਣਾ ਇਹੜੇ ਕਿੰਤੂ ਪ੍ਰੰਤੂ ਹੁੜਖੜੇ ਕਰਦੇ ਨੇ ਆ ਐ ਕਿਉਂ ਹੁੰਦਾ ਹੈ ਉਹ ਕਿਉਂ ਦੇ ਜਵਾਬ ਤਾਂ ਉੱਥੇ ਨੇ ਇੱਥੇ ਕਿੱਤਨੇ ਅਸਲੀ ਗਿਆਨ ਤਾਂ ਉੱਥੋਂ ਸ਼ੁਰੂ ਹੁੰਦਾ ਹੈ ਕਿਵੇਂ ਪਾਈ ਕਿਵੇਂ ਚੱਲ ਰਹੀ ਹੈ ਕਿਉਂ ਚੱਲ ਰਹੀ ਹੈ ਹਰ ਕਿਉਂ ਹੁੰਦਾ ਜਵਾਬ ਉੱਥੇ ਹੈ ਇੱਥੇ ਨਹੀਂ ਹੈਗਾ ਇੱਥੇ ਦਾ ਇਹਦੇ ਮਤਲਬ ਦਾ ਗਿਆਨ ਹੈ ਉੱਥੇ ਰਾਹ ਪਿਆ ਹਾਂ ਰਾਹ ਪੈ ਜਾ ਘਰ ਵਾਪਸ ਚ ਵਿਲਵੇ ਵਿੱਚ ਵੜ ਜਾ ਵਾਕੀ ਮਿਲ ਕੇ ਮੈਂ ਚੱਲਦੀ ਆ ਤੁਹਾਡਾ ਕਿਵੇਂ ਕੜਨਾ ਰੋਕੀ ਹੁਸਤੀਆ ਵਿੱਚ ਕਿਵੇਂ ਹੁੰਦੀ ਹੈ ਹੂਟੇ ਕਿਵੇਂ ਪੈਂਦਾ ਨੇ ਆਪੇ ਪਤਾ ਲੱਗ ਜੂਆ ਤਰ ਖੜਾ ਪੁੱਛੀ ਜਾਂਦਾ ਅੰਦਰਲਾ ਗਿਆਨ ਬਹੁਤ ਹੈ ਬਾਹਰਲਾ ਗਿਆਨ ਥੋੜਾ ਹੈ ਬਾਹਰਲਾ ਕਿੰਦਾ ਕਿੰਦਾ ਗਿਆਨ ਕਿੰਦਾ ਇੱਕ ਜਿਸ ਜੀਵ ਸਾਬਾ ਤਾਂ ਕਿ ਕਣਕੇ ਜਿਹਨਾਂ ਗਿਆਨ ਨੂੰ ਬਾਹਰ ਬਣਾਇਂ ਬੈਠਾ ਉਹ ਦੁਕਾਨਾਂ ਨੇ ਬਣਾਤਾ ਤਾਂ ਜਿਹੜੀਆਂ ਦੁਨੀਆਂ ਡੁਪਲੀਕੇਟਾਂ ਕੋਈ ਬਹੁਤਾ بڑا ਗਿਆਨ ਨਹੀਂ ਹੈ ਸਮਝਣ ਕੀਤੀ ਹੈ ਚਾਂਦੀ ਦਿੱਤਾ ਅਸੀਂ ਤਾਂ ਆ ਜਵੈਲਾ ਜਾਂ ਦੇਖਿਆ ਮਤਾਂ ਦੇਖਿਆ ਜੇ ਨਾਲ ਟਾਈਮ ਹੋਇਆ ਦੂਰ ਹੋ ਜਾਂਦੇ ਆ ਮੇ ਸਕੂਟਰ ਤੇ ਇਟਾ ਇੱਕੋ ਗੱਲ ਨੂੰ ਵਾਰ ਵਾਰ ਸਮਝਾਇਆ ਹੈ ਦ੍ਰਿੜੇ ਕਰਾਇਆ ਹੋਇਆ ਜੋ ਤਾਂ ਅਈ ਨਾ ਹੀ ਆਣਾ ਹੋਈ ਐ ਤੇ ਤੇ ਚੰਨ ਸਭ ਚਾਨਣ ਹੋਈ ਐਨੀ ਉਹ ਗੱਲ ਮੰਨ ਲਵੇਗਾ ਪੂਰਾ ਹੋ ਗਿਆ ਠੀਕ ਹੈ ਜੀ ਗ੍ਰਹਿ ਧਨ ਸਭ ਪਵਿੱਤਰ ਹੋਏ ਹਰ ਗੁਣ ਗਾਓ ਆ ਹੁਣ ਹਰ ਕੇ ਗੁਣ ਗਾਉਣਾ ਉਹ ਹਰ ਕੇ ਗਾ ਰਹੀ ਐ ਸਾਡੀ ਸੱਚ ਕਰਨ ਦੀ ਜਨਤਾ ਉਹ ਗੁਆ ਰਹੀ ਐ ਗਾ ਵੀ ਰਹੀ ਐ ਗੁਆ ਵੀ ਰਹੀ ਐ ਅਜਿਹੇ ਇੱਥੇ ਦੇ ਲੋਕ ਬੋਲਦੇ ਨੇ ਕਿ ਉਹ ਬੋਲਦੇ ਨੇ ਕਾਹਨੀਆਂ ਇਹ ਗਾਉਂਦੇ ਨੇ ਉਹਨਾਂ ਦੀ ਨਕਲ ਤੇ ਉੱਥੇ ਗਾਉਣ ਦਾ ਕੀ ਮਤਲਬ ਰਹੇਗਾ ਜੀ ਸੱਚ ਖਾਣ ਦਾ ਕੀ ਮਤਲਬ ਰਹੇਗਾ ਉਹ ਤੇ ਆਪਣੇ ਸਾਜ਼ ਇਕੱਠੇ ਕਰਕੇ ਵੱਢ ਕੇ ਸਰਾਣੇ ਲਾ ਦੇਉਂਦੇ ਨੇ ਇੱਥੇ ਵਾਲਿਆਂ ਨੂੰ ਕਹਾਂ ਕੋ ਆਵੇ ਨੂੰ ਸੁਰਤਾਲ ਚ ਲਿਆ ਰਹੇ ਨੇ ਉੱਥੇ ਗਾਉਣ ਤਾਂ ਸੁਰਤਾਲ ਤੇ ਹੋਵੇ ਸਿੱਖਿਆ ਤਾਂ ਉੱਥੋਂ ਹੀ ਮਿਲਦੀ ਆ ਉਹ ਗੁਰੂ ਸਿੱਖਿਆ ਹੀ ਦਿੰਦਾ ਹੁੰਦਾ ਉੱਥੇ ਗੁਰੂ ਨਾ ਸਾਰੇ ਗੁਰੂ ਇਹਨੇ ਸਾਰੇ ਹੀ ਗ੍ਰਹਿ ਧਨ ਸਭ ਪਵਿੱਤਰ ਹੋਏ ਹਰਕੇ ਗੁਣ ਗਾਵੋ ਉਸ ਦਾ ਆਸਗਾ ਉਸ ਮੈਂ ਨਾ ਨਾ ਆਪਣੀ ਬੜਾਈ ਨਾ ਕਰ ਉਹਦੀ ਕਰ ਜਿਹੜਾ ਤੇਤੋਂ ਵੱਡਾ ਜਿਹਨੇ ਤੈਨੂੰ ਪੈਦਾ ਕੀਤਾ ਉਹਦੀ ਉਹਦੇ ਉਹਦਾ ਗੁਣ ਗਾਣ ਕਰ ਆਪਣੀ ਗਾਈ ਜਾਂਦੇ ਠੀਕ ਹੈ ਜੀ हर नाम ਵਪਾਰੀ ਨਾਨਕਾ ਵਡਭਾਗੀ ਪਾਉ ਜਿਹੜੇ ਹਰ ਦੇ ਨਾਮ ਦੇ ਵਪਾਰੀ ਨੇ ਨਾਨਕ ਕਹਿੰਦਾ ਵਡਭਾਗੀ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ ਉਹਨਾਂ ਦਾ ਦਰਸ਼ਨ ਵੱਡੇ ਭਾਗਾ ਕਰਕੇ ਹੁੰਦਾ ਪਉੜੀ ਜੋ ਤੁਧ ਭਾਵੈ ਸੋ ਭਲਾ ਸਚ ਤੇਰਾ ਭਾਣਾ ਤੂੰ ਸਭ ਮੈਂ ਇੱਕ ਵਰਤਦਾ ਸਭ ਮਾਹਿ ਸਮਾਨ ਆ ਜੋ ਵਰਤਿਆ ਸੰਸਾਰ ਤੇ ਇਹੀ ਤਾਂ ਤੇਰਾ ਭਾਣਾ ਇਹੀ ਤਾਂ ਤੂੰ ਚਾਹਣਾ ਭਾਣਾ ਤੇਰਾ ਕੋਲ ਲੁਕਿਆ ਹੋਇਆ ਕੋ ਡੱਬੀ ਚ ਲਗੋਇਆ ਹੋਇਆ ਧਿਆਨ ਦੇ ਦੀ ਜੋ ਵਰਤਿਆ ਸ੍ਰਿਸ਼ਟੀ ਤੇ ਤੇਰਾ ਭਾਣਾ ਨਹੀਂ ਤਾਂ ਇਹ ਧਿਆਨ ਰੱਖਣਾ ਇਹਦੇ ਵਿੱਚ ਅਨੇਜੋ ਤੇਰਾ ਭਾਣਾ ਪਛਾ ਤੇਰੀ ਰਜ਼ਾ ਪਛਾਨਣੀ ਐ ਭਾਣਾ ਨਹੀਂ ਪਛਾਨਣਾ ਹੈ ਪਾਣਾ ਵਰਤ ਰਿਹਾ ਰਜ਼ਾ ਪਛਾਣ ਲਈਓ ਤੇਰੀ ਠੀਕ ਹੈ ਤੇਰੀ ਰਜ਼ਾ ਹੀ ਉਹ ਪਾਣਾ ਵਰਤ ਰਿਹਾ ਹੁਕਮ ਰਜ਼ਾਈ ਚੱਲਣਾ ਤੇਰੀ ਰਜ਼ਾ ਬਣ ਗਿਆ ਜਦ ਤੇਰੇ ਮਨ ਵਿੱਚ ਵਿਥੀ ਹੋ ਜਾਰ ਹੋ ਗਿਆ ਅਸਰ ਜੇ ਤੇਰਾ ਪਾਣਾ ਹੀ ਤਾਂ ਤੇਰਾ ਮਨ ਪਰ ਜਿੰਨਾ ਬਾਦ ਆਉਂਦੀਆਂ ਨਾ ਦਸੀ ਉਹ ਨਹੀਂ ਹੁੰਦੀਆਂ ਪਾਣੇ ਦੀ ਜਿੰਨਾ ਜਿੰਨਾ ਘਾਣਾ ਬਾਹਰ ਆਉਂਦਾ ਉਹਨਾ ਜਿੰਨਾ ਅੰਦਰ ਵਰਤ ਜਾਂਦਾ ਅਗਲੇ ਰਾਜੀ ਪਤਾ ਹੈਗਾ ਜੋਤੀ ਸੀ ਜੈ ਥੱਕ ਲੈਣ ਕਿਤਾਬਾਂ ਲਿਖ ਲਿਖ ਚਾਹੇ ਤਾਂ ਥੱਕ ਲਾ ਲਾ ਕੇ ਉਹ ਸੋਚਦੇ ਨੇ ਕੋ ਜੋਰ ਹੋ ਜਾਂਦਾ ਕੋ ਜੋਰ ਕਬੀਰ ਕਹਿੰਦਾ ਮੇਰਾ ਜਤਪਿਆ ਨਾ ਕਰੇ ਆਪਣਾ ਜਤਪਿਆ ਹਾਰ ਕਰੇ ਜੋ ਮੇਰੇ ਜਿਤ ਨਾ ਹੋਏ ਜਤਪ ਦਾ ਹਾਰ ਹੈ ਠੀਕ ਹੈ ਜੀ ਠੀਕ ਹੈ ਜੀ ਤੂੰ ਸਬ ਮੈਂ ਇੱਕ ਵਰਤਦਾ ਸਬ ਮਾਹੇ ਸਮਾਨ ਭਾਵੇਂ ਜੇ ਕੋਈ ਹੁਕਮ ਵਰਤਦਾ ਉਹ ਜੋਤ ਕਰਕੇ ਵੀ ਇੱਕ ਆ ਹੁਕਮ ਕਰਕੇ ਵੀ ਕੰ ਤੂ ਆ ਦਾ ਕੀ ਹੈ ਫਿਰ ਕਈ ਜਨਨ ਨੇ ਜੀ ਆ ਜੀ ਚਮਾਰ ਹੈ ਜੀ ਇਹ ਇਹਨੂੰ ਚੁੱਲੇ ਤੇ ਨਾ ਚੱਲਣ ਦੋ ਇਹਨੂੰ ਜੀ ਮੰਦਰ ਨਾ ਜਾਣ ਦੋ ਇਹ ਸੱਚ ਹੈ ਜੇ ਸੱਚ ਖੜਦਾ ਹੁਕਮ ਤੂੰ ਸਭ ਮੈਂ ਇੱਕ ਵਰਤਦਾ ਪਰ ਸਾਰੇ ਅਪਰਾਧੀ ਨੇ ਜਿਹੜੇ ਬੰਦੇ ਰਹੇ ਨੇ ਨੀਝੂਚ ਫਰੀਦਰਗਾਹ ਦੇ ਹਿਸਾਬ ਨਾਲ ਤਾਂ ਅਪਰਾਧੀ ਹੋਣੇ ਦੀ ਦਰਗਾਹ ਦੇ ਹਿਸਾਬ ਨਾਲ ਅਪਰਾਧੀ ਹੋਣੇ ਦੀ ਗੱਲ ਸੱਚੀ ਏ ਅਸੀਂ ਦੀ ਗੱਲ ਨੂੰ ਸੱਚੀ ਮੰਨਾਂਗੇ ਬਾਕੀ ਅਪਰਾਧੀ ਨੇ ਫਿਰ ਝੂਠ-ਝੂਠ ਮੰਨਣ ਵਾਲੇ ਠੀਕ ਹੈ ਜੀ ਥਾਂਤਨੰਤਰ ਰਬ ਰਿਹਾ ਜੀ ਅੰਦਰ ਜਾਣਾ ਸਾਥ ਸੰਗੀ ਮਿਲ ਪਾਈਏ ਮਨ ਸੱਚੇ ਭਾਣਾ। ਤਾਂ ਦਾ ਅਰਥ ਚੇਤਾ ਲਾ ਲਾਂਗੇ ਬਾਹਰ। ਅੱਛਾ ਜੀ। ਫਿਰ ਤਾਂ ਕਣ ਕਣ ਜੋ ਜੂ ਬਗਵਾਨ। ਇਹ ਦਾ ਹਰਦਾ ਲਾ ਮਾਗੇ ਆਸ ਫਿਰ ਉਹਣੀ ਗੱਲ ਠੀਕ। ਉਹਨੇ ਜਾਣਾ ਕਿੱਥੇ ਐ? ਕਿਸੇ ਦੇ ਆਪਾਂ ਘਰ ਜਾਈਏ ਘਰ ਵਾਲਾ ਘਰ ਨਾ ਹੋਵੇ। ਜਿਆਦਾ ਦੇ ਜਿਆਦਾ ਤੁਸੀਂ ਆ ਕੇ ਕੁਰਸੀ ਤੇ ਬਹਿ ਜਾਓ। ਚੁੱਪ ਕਰਕੇ ਬੈਠੇ ਹੀ ਰਹੂਗੇ ਜਿੰਨਾ ਚਿਰ ਮਾਲਕ ਦੀ ਆਉਦਾ ਹਾਲਗਾਊਗਾ ਉਹਨਾਂ ਨਾਲ ਗੱਲਾਂ ਕਰਾਂਗੇ ਜਿਹਨੀਆਂ ਗੱਲਾਂ ਨੇ ਵਾਪਸ ਚਲੇ ਜਾਵਾਂਗੇ ਉਹ ਜਿੱਥੇ ਚੇਤਨਾ ਉਹਨੇ ਚੇਤਨਾ ਚੇਤਨ ਕੋਲ ਜਾਣਾ ਜੜ ਕੋਲ ਜਾਣਾ ਉਹ ਜਿਹਦੇ ਨਾਲ ਗੱਲ ਕਰਨੀ ਹੈ ਜਿਹਨੂੰ ਕੋਈ ਸਮਝਾਉਣਾ ਹੈ ਕੋਲ ਜਾਣਾ ਰਾਮਚੰਦਰ ਮੰਦਿਰ ਨਾਲ ਗੱਲਾਂ ਕਰਦਾ ਫਰੀ ਜਾਵੇ ਉਹ ਨਾਲ ਰੱਖ ਤੌਦੀ ਸੁਣਨਾ ਨਾਲ ਰੱਖਾਂ ਨਹੀਂ ਸੁਣਨਾ ਰਖਤਾ ਨਾ ਗੱਲਾਂ ਦਾ ਕਰਦਾ ਰਿਹਾ ਰਾਮਚੰਦਰ ਦਿਖਾਇਆ ਭਾ ਕਿਸੇ ਦੱਸਨੇ ਰਾਹ ਵੀ ਦੱਸਿਆ ਉਹਨੂੰ ਅਰਾਧ ਉਸੇ ਜਿਹਾ ਯੂਰ ਰਖਦਣੇ ਤਾਂ ਰਾਹ ਨਹੀਂ ਦੱਸਿਆ ਕਿਸੇ ਨੇ ਰਖਦੋ ਉਹਦੀ ਸੀ ਜਾਣਦਾ ਉਹਦਾ ਰਖਦੀ ਬੋਲੀਤੀ ਸੀ ਜਾਣਦਾ ਉਹਦਾ ਇੱਕ ਮੈਂ ਕਵੀ ਨੇ ਉਹਦਾ ਬਿਯੋਗ ਦਾ ਬਿਰਹਾ ਦਾ ਨਕਸ਼ਾ ਖਿੱਚ ਦਿੱਤਾ ਰਾਮਚੰਦਰ ਦੀ ਅਵਸਥਾ ਨੂੰ ਜਿਆਦਾ ਡਾਊਨ ਕਰਤਾ ਲਿਖ ਕੇ ਇੰਨਾ ਡਾਊਨ ਵਸਤਾ ਵਾਲਾ ਰਾਮਚੰਦਰ ਨਹੀਂ ਸੀ ਜਿੰਨਾਂ ਲੈ ਦਿੱਤਾ ਆਖਰ ਰਾਜਾ ਸੀ ਉਹ ਐਡਾ ਹੀ ਡਰ ਗਿਆ ਸੀ ਸੀਤਾ ਜੀ ਭਰਾਂ ਲੈ ਵੀ ਗਿਆ ਸੀ ਕੋਈ ਅਨਾਈ ਤੇ ਵੀ ਆਪਹਾੜਨ ਹੋ ਜਾਂਦੇ ਨੇ ਬੱਚਿਆਂ ਦੇ ਕੋਈ ਦੇਖੇ ਨਾ ਮਾਂ ਬਾਪ ਦਰਖਤਾਂ ਨੂੰ ਪੁੱਛਦੇ ਕਿਧਰ ਗਿਆ ਮੇਰਾ ਮੁੰਡਾ ਉਹ ਤਾਂ ਇਹਨਾਂ ਨਾਲ ਹੀ ਡਾਊਨ ਕਰਤਾ ਅਧਿਆਨ ਦਾ ਬੰਦਾ ਪੁੱਛਦਾ ਭਾਈ ਇੰਦਰ ਜਾਂਦੀ ਗੱਡੀ ਦੇਖੀ ਹੋਵੇ ਇੱਧਰ ਕੋਈ ਜਾਂਦਾ ਦੇਖਿਆ ਹੋਵੇ ਉਹ ਮੀਲ ਪੱਥਰਾਂ ਨੂੰ ਵੀ ਪੁੱਛਦਾ ਕੋਈ ਉਹਦਾ ਵਿਚਾਰੇ ਦੀ ਰਾਮ ਜੰਨਾ ਨੂੰ ਤਾਂ ਉਹ ਹੀ ਨੇ ਪੜ੍ਹਤਾ ਹਾਂਜੀ ਹਾਂਜੀ ਥਾਂਤ ਨੰਤਰ ਰਬ ਰਹਾ ਜੀ ਅੰਦਰ ਜਾਣਾ ਥਾਂਤ ਨੰਤਰ ਬਸ ਰਹਾ ਕਿੱਥੇ ਬਸ ਰਹਾ ਅੰਦਰ ਜਾਣਾ ਜੀ ਦੇ ਅੰਦਰ ਬਸ ਰਹਾ ਸਾਂਤ ਰੰਤਲ ਅਮਰੇ ਹੈ ਜੀ ਅੰਦਰ ਜੀ ਦੇ ਅੰਦਰ ਉਹ ਤੇਰੇ ਅੰਦਰ ਹੈ ਕਿਤੇ ਕਣ ਕਣ 'ਚ ਭਗਵਾਨ ਕਹਿ ਲੈਂ ਮੈਂ ਠੀਕ ਹੈ ਜੀ ਸਾਧ ਸੰਗੀ ਮਿਲ ਪਾਈ ਹੈ ਮਨ ਸੱਚੇ ਭਣ ਸਾਧ ਸੰਗੀ ਹੋਵੇ ਨਾ ਕੋਈ ਜਿਨੇ ਆਪਣਾ ਸੰਗੀ ਸਾਧਿਆ ਹੋਇਆ ਹੋਵੇ ਜਿਨੇ ਆਪਣਾ ਮਨ ਸਾਧਿਆ ਹੋਵੇ ਸਾਧ ਸੰਗੀ ਹੁੰਦਾ ਜਿਨੇ ਮਨ ਸਾਧ ਲਿਆ ਸਾਧ ਸੰਗੀ ਹੈ ਬੁੱਧੀ ਸਾਧ ਸੰਗੀ ਹੈ ਤੇ ਬੁੱਧੀ ਨਾਲ ਮਨ ਸਾਧਨੇ ਆ ਬੁੱਧੀ ਸਾਥ ਸੱਗੀ ਆਲ ਸੰਗੇ ਮਿਲ ਪਾਈਦਾ ਆਹੋ ਜੇ ਮਨ ਨੂੰ ਸੱਚਾ ਭਾਜਵੇ ਹੋਵੇ ਤਾਂ ਨਹੀਂ ਮਿਲਦਾ ਕੋਈ ਸਾਧਨਾ ਕੋਈ ਔਖਾ ਨਹੀਂ ਹੈ ਉਹਨੂੰ ਬਣਾ ਲੈਣਾ ਕੋਈ ਔਖਾ ਨਹੀਂ ਹੈ ਉਹ ਤੇਰੇ ਸਾਧਨਾ ਕਰਕੇ ਬਣਾਈ ਵਾਛੇ ਮਨ ਨੂੰ ਜਿੱਧਰ ਮਰਜੀ ਮਨ ਲਾ ਲੈਂਦੇ ਨੇ ਆਠ ਆਠ ਰਣ ਭੋਰਿਆਂ ਚੋਂ ਨਹੀਂ ਹਿਲਦੇ ਮਨ ਮਨਾਏ ਹੁੰਦੇ ਇਹਨਾਂ ਜਿਹੜਾ ਆਪਾਂ ਨੇ ਇਕੱਠੇ ਰਹਿਣਾ ਮਨ ਨਹੀਂ ਹੈ ਪਰਦੇ ਦੀ ਉੱਤੇ ਠੀਕ ਹੈ ਜੀ ਪਰ ਸੱਚ ਨਾਲ ਨਹੀਂ ਉਹ ਮਾਇਆ ਵਾਸਤੇ ਹੁੰਦੇ ਨੇ ਵੀ ਜਾਣ ਕਦਾਂਗੇ ਮਾਇਆ ਮਾਇਆ ਹੈ ਬੰਦੇ ਬਣਾਉਣ ਦੇ ਬਹੁਤ ਤਰੀਕੇ ਨੇ ਬੰਨ ਇੱਕ ਇਤਜ਼ਾਲਦਾਰ ਵੀ ਮਨੁੱਖ ਹੁੰਦਾ ਬੈਠਣ ਵਾਸਤੇ ਕਾਨ ਕਰਦਾ ਹੈ ਮਨ ਮਾਰ ਕੇ ਉਹ ਵੀ ਤਾਂ ਮਨ ਮਾਰ ਕੇ ਬਹਿੰਦਾ ਹੈ ਹਾਂਜੀ ਨਾਨਕ ਪ੍ਰਭ ਸਰਨਾਗਤੀ ਸਦ ਸਦ ਗੁਰਬਾਣਾ ਸਦਾ ਸਦਾਈ ਕੁਰਬਾਨ ਨਾਨਕ ਤੁਮ ਐਸੇ ਮਹਾਪੁਰਖਾਂ ਦੇ ਐਸੇ ਕੁਰਬਖਾਂ ਦੇ ਸਦ ਸਦ ਕੁਰਬਾਨ ਨਾਨਕ ਕਿਉਂ ਉਹ ਨਾਨਕ ਤੋਂ ਮੂਹਰੇ ਖੜੇ ਨੇ ਉਹਨਾਂ ਨੇ ਪ੍ਰਕਿਰਿਆ ਉਹਨਾਂ ਦੀ ਹੋ ਚੁੱਕੀ ਹੈ ਨਾਨਕ ਜੋ ਰਾਜ ਹੈ ਨਾਨਕ ਜੀ ਲਈ ਖੜਾ ਨਾ ਬੋਲਦਾ ਪੰਜਵਾ ਠੀਕ ਹੈ ਜੀ ਉਹ ਸੱਜਣਾਂ ਦੇ ਬੈਠੇ ਨੇ ਸਦ ਸਦ ਕੁਰਬਾਨ ਨਾਲ ਕਹਿਣਾ ਹੀ ਹੈ ਠੀਕ ਹੈ ਜੀ ਇਹ ਮੋਰਲੀ ਕਲਾਸ ਪਾਸ ਕਰ ਗਿਆ ਇੱਕ ajo ਪਿਛਲੀ ਚ ਫਾਸਦ ਕੁਰਬਾਨਾ ਤਾਂ ਹੈ ਉਹ